ਸਤਿ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾ ਕੇ ਰਿਦੇ ਪ੍ਰਵੇਸ਼ ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾ ਕੇ ਰਿਦੇ ਪ੍ਰਵੇਸ਼ ਜੇ ਕੋ ਸਾਧੂ ਹੁੰਦਾ ਉਹ ਜੋ ਬੋਲਦਾ ਉਹਦਾ ਉਪਦੇਸ਼ ਸਤ ਬਚਨ ਹੁੰਦਾ ਇਹ ਸਤ ਬਚਨ ਨਹੀਂ ਤਾਂ ਸਾਧੂ ਨਹੀਂ ਪਰ ਬਾਣੀ ਸਤਵਚਨ ਹੈ ਸਾਧੂ ਦਾ ਉਪਦੇਸ਼ ਹੈ ਕਿਹਾ ਹੈ ਸਾਧੂਆਂ ਦਾ ਉਪਦੇਸ਼ ਕੀ ਕਹਾ ਹੈ ਸਾਧੂ ਇੱਕ ਬਚਨ ਹੈ ਹਰ ਸਾਧੂ ਜਦ ਬੋਲਦਾ ਉਹ ਸੱਚ ਦੀ ਵਿਆਖਿਆ ਕਰਦਾ ਸੱਚੀ ਗੱਲ ਕਰੇ ਜੇ ਉਪਦੇਸ਼ ਦਿੰਦਾ ਹੈ ਜੇ ਉਪਦੇਸ਼ ਦਿੰਦਾ ਤਾਂ ਸੱਚਾ ਦਿੰਦਾ ਨਹੀਂ ਉਪਦੇਸ਼ ਦੇ ਵਿੱਚ ਆਂ ਜੜੀਆਂ ਨੇ ਜੀਵਨ ਦੀਆਂ ਕਥਾਵਾਂ ਇਹ 7 ਵਜੇ ਸਾਧੂ ਬ੍ਰਹਮ ਦੇਸ ਦੀ 7 ਵਜੇ ਦੀ ਹੁੰਦੀ ਜੀਵਨ ਦੀ ਕਥਾ ਸਾਤ ਜੀਵਨ ਦੀ ਕਥਾ ਜੋ ਸੁਣਾਵਾ ਕੋਈ ਝੜੀਆਂ ਨੇ ਇਹਦੇ ਨਾਲ ਹੋ ਸਭ ਇੱਕ ਅੰਦੀ ਕੋਈ ਜੁੜ ਸਕਦੀ ਆ ਉਹਦੇ ਨਾਲ ਟੋਟਲ ਸਾਖੀ ਨਹੀਂ ਸਕ ਸਾਧੂ ਬ੍ਰਹਮ ਸਤਿਵੰਦ ਜੀ ਸਾਧੂ ਉਪਦੇਸ਼ ਸਾਧੂ ਉਪਦੇਸ਼ ਜਿਹੜਾ ਦੇ ਵਿੱਚ ਪਰਵੇਸ਼ ਕਰ ਜੇ ਸਾਧੂ ਦਾ ਉਪਦੇਸ਼ ਹੋਵੇ ਜਿਹੜਾ ਮੰਨ ਲਵੇ ਸਾਧੂ ਦੇ ਉਪਦੇਸ਼ ਨੂੰ ਸਮਝ ਲਵੇ ਮੰਨ ਲਵੇ ਅਸਲ ਸਮਝੇ ਤਾਂ ਬਿਨਾ ਮੰਨੇ ਨਹੀਂ ਹੁੰਦਾ ਜਿਹੜੀ ਗੱਲ ਦੀ ਆਪਾਂ ਨੂੰ ਸਮਝ ਨਹੀਂ ਆਉਂਦੀ ਅਗਰ ਹੁੰਦੇ ਦੀ ਉਹ ਜਿਹੜਾ ਅਸੀਂ ਮਰਵਾਣੀ ਨੂੰ ਮੰਨਦੇ ਆ ਨਾ ਕਹਿੰਦੇ ਆ ਮੰਨਦੇ ਆ ਮੰਨਦਾ ਬੰਦਾ ਕੋਈ ਨਹੀਂ ਹੈ ਉਹ ਸਾਡੇ ਅਕਦੇ ਨੇ ਉਹ ਗੁਰਪ੍ਰਾਣ ਜਿਆਦਾ ਨਹੀਂ ਮੰਨੂਗਾ ਕੀ ਜੇ ਬੇਸਮਝੀ ਨਾਲ ਮੰਨੂਗਾ ਉਲਟਾ ਉਸਨੂੰ ਕਰੂਗਾ ਬੇਸਮਝੀ ਨਾਲ ਹੋਦੀਆਂ ਗੱਲਾਂ ਬੰਦੀਆਂ ਹੋ ਨੇ ਗੁਰਬਾਨੀ ਦੀ ਸਭੇ है नहीं, ਲੋਕਾਂ ਨੇ ਗੁਰਬਾਨੀ ਦੇ अर्थ ਬੇਸਮਝੀ ਨਾਲ हो ਰਹੇ करके ਸਾਖੀਆਂ ਸੁਖੀਆਂ ਚ ਹੋ ਰਹੇ ਸੁੱਟੇ ਨੇ ਇਸ ਕਰਕੇ ਗੁਰਬਾਨੀ ਨੂੰ ਨਹੀਂ ਕੋਈ ਹੁੰਦਾ ਹਿਰਦੇ 'ਚ ਪਰਬੈਸ਼ਕੀ ਕੀਤੀ ਹੈ ਇਹ ਹਿਰਦੇ ਦੇ principles ਹੈ ਇਹ ਹੈ ਸਿੱਖੀ ਗੁਰਬਾ ਗੁਰਮੱਤ ਦਾ ਸਿੱਖੀ ਗੁਰਬਾਨੀ ਇਹ ਹਿਰਦੈ ਪ੍ਰਵੇਸ਼ ਤਾਂ ਕਰੂ ਜੇ ਸਮਝ ਆਉ ਮੰਦੂ ਪਹਿਲਾਂ ਸਮਝ ਆਵੇ ਫਿਰ ਬੰਦੇ ਤਾਂ ਹਿਰਦੈ ਪ੍ਰਵੇਸ਼ ਵਰਨਾ ਨਹੀਂ ਤਾਂ ਸੱਚ ਪਿਆਰ ਹਾਂ ਜਦ ਜਨ ਫਿਰ ਗਿਆਨੀ ਹੋ ਗਿਆ ਉਹ ਧਿਆਨ ਕਾਣਾ ਹੋ ਗਿਆ ਜਾਕੀ ਦੇ ਦੇ ਬੀ ਜਿਹੜੇ ਹਿਰਦੈ ਪ੍ਰਵੇਸ਼ ਹੈ ਉਹ ਜਨ ਵੀ ਹੈ ਗਿਆਨवान ਵੀ ਹੈ ਲੈਣਾ ਜਦ ਹੋਇਆ ਜਦ ਉਹ ਗੁਰਮਤਿ ਦਾ ਉਹਦੇ ਅੰਦਰ ਪ੍ਰਵੇਸ਼ ਹੋ ਗਿਆ ਉਹਨੂੰ ਸਮਝ ਆ ਗਈ ਉਹਨੂੰ ਬੰਦ ਨਾੜਕ ਪੈਲਾਂ ਨਾ ਰਹਿਣਾ ਜਾਨਾ ਜਾਨਾ ਨਾ ਰਹਿਣਾ ਜਾਨਣ ਗਿਆਨੀ ਨੂੰ ਰਹਿਣ ਜਾਣਕਾਰ ਅਬਦ ਨਰਸ ਉਹ ਜੇ ਕੋਈ ਨਾਮ ਜਪਤ ਸਾਗੀ ਗਤੀ ਹੋਏ ਸਤਿ ਧਰਤ ਉਹ ਜੇ ਕੋਈ ਜੇ ਕਹਿੰਦਾ ਨਹੀਂ ਜਦੋਂ ਆਦਮੀ ਸੱਚ ਨੂੰ ਮੁਝਲ ਹੋਏ ਹਾਂ ਹਾਂ ਫਿਰ ਉਹ ਸਿਖਾਣਿਆ ਮਨਮੁਖ ਉਹ ਸਾਕਤ یہ سچ وہ بھی مجلبی نا ہاجی کی ایسی شക്തി ہے کہ وہ بھی مجلبی ہے کیا بالمیک فلیسا کیراں نے جوڑی ہو گی ਬੁੱਝੇ ਕੋਈ ਜੇ ਦਰਸਤਾ ਨਹੀਂ ਬੁੱਝਲ ਬੈਠਾ ਸੱਚ ਨੂੰ ਨਾਮ ਜਦੋਂ ਕੀ ਗਤੀ ਹੋਈ ਨਾਮ ਜਦ ਇਤਸਾਮ ਨੂੰ ਸਮਝ ਲਵੇ ਉਹ ਵੀ ਗਾਹ ਦਤੀ ਸ਼ੀਲ ਹੋ ਜਾਂਦਾ ਉਹ ਗਤੀ ਛੇਤੀ ਨਾਮ ਦਾ ਭਾਕ ਦਾ ਚੇਲਾ ਛੱਪੜ ਦਾ ਪਾਟ ਲੱਡੂ ਹੁੰਦਾ ਸਾਗਤ ਕੋਲ ਉਹ ਕੀ ਕਰਦਾ ਛੱਪੜ ਦਾ ਪਾਣੀ ਕੋਲ ਉਹ ਫਿਰ ਉਹ ਖੋਖਰ ਖੋਖਰ ਦਾ ਜਿਹੜੇ ਪੋਖਰ ਚੱਪੜੀਆਂ 'ਚ ਫਿਰਨ ਵਾਲੇ ਸੱਟੜੇ ਸੱਤਾ ਕੋਲ ਸਰਕਾਰ ਉਹ ਡਰ ਹੁੰਦਾ। ਤੋਂ ਜਿਹਦੇ ਕੋਲ ਦੇਖਿਆ ਚਲਾ ਗਿਆ ਜਿਹਦੇ ਕੋਲ ਦੇਖਿਆ ਚਲਾ ਗਿਆ ਉਹ ਡਰ ਤੋਂ। ਜੇ ਸਾਥੀ ਨੂੰ ਮੰਜੇ ਲਵੇ ਕੋ ਤਾਗੜ ਸੱਤਾ ਕੋਲ ਨਾ ਉਹਨਾਂ ਦੇ ਦਹਿਰਦਬਦ ਨਿਕਲ ਜਾਂਦਾ। ਕੋਈ ਵਿਸ਼ਵਾਸ ਨਹੀਂ ਰੱਖਦਾ। ਜੇ ਵਿਸ਼ਵਾਸ ਵੀ ਰੱਖਦਾ ਹੁੰਦਾ ਉਹਦਾ ਵਿਸ਼ਵਾਸ ਫਰੇ ਹੋ ਜਾਂਦਾ ਉਹ ਕੰਮ ਛੱਡੋ ਪਰੇ ਉਹਦਾ ਪਖੰਡੀ ਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵਰਨ ਦਾ ਪਤਾ ਨਹੀਂ ਸੀ ਉਹ ਦੋਸੀਂ ਨੂੰ ਬੰਦੇ ਸੀ ਉਹ ਨਾ ਇਹ ਧਰਤ ਜਿਹੜਾ ਹੈ ਫਸੇ ਨੂੰ ਮੁਝੇ ਦਵੇ ਨਾਮ ਜਪਤ ਤਾਂ ਹੀ ਗੱਤ ਹੋਇਆ ਹਾਂ ਅੰਮ੍ਰਿਤ ਸਮਝ ਲਵੇ ਆਹ ਗੁਰਬਾਣੀ ਨੂੰ ਤਾਂ ਹੁੰਦੀ ਹੈ ਇਹ ਸਮਝਣਾ ਫਿਰ ਨਹੀਂ ਗੁਰਬਾਣੀ ਨੂੰ ਸੁਣ ਕੇ ਅੱਖ ਨਹੀਂ ਬਣਦਾ ਸਮਝੀ ਤੇ ਲੋਕਾਂ ਨੇ ਸੁਣ ਨੂੰ ਪਹਿਲਾਂ ਪ੍ਰਚਾਰ ਅਜਲ ਪਹਿਲਾਂ ਕਰਦੇ ਵੀ ਬੜਾ ਕਲਿਆਰ ਹੋ ਹੋ ਹੋ ਹੋ ਹੋ ਮੋਟਾ ਜਨ ਜਲ ਦੋੜੇ ਸੁਣ ਜਾਂਦੇ ਸੀ ਇਹ ਲੋਕਾਂ ਨੂੰ ਜਲ ਹੋ ਜਾਂਦਾ ਪਤਾ ਨਹੀਂ ਅਸੀਂ ਸੁਰਲੀ ਵਾਲੀ ਐਸਾ ਪਹਿਲਾਂ ਅਸਲੋ ਪੂਰਾ ਸਮਝ ਲੈ ਪੂਰਾ ਅਸਰ ਪੂਰਾ ਸਮਝਦੇ ਹੋਣ ਜਿੱਦੇ ਕੋ ਸਮਝੋ ਨਾ ਅਸਰ ਜਿੱਦੀ ਕੋ ਸਮਝੋ ਇਹ ਜਾ ਅਸਰ ਸਸ ਜਦ ਤੂੰ ਜੇ ਕੋਏ ਅਸ 부ਝੇ ਜੇ ਕੋਏ 부ਝੇ ਲਵੇ ਵੀ ਹਾਂਏ ਦਾ ਠੀਕ ਹੈ ਫਿਰ ਜਿਵੇਂ ਜਿਵੇਂ ਜਪਤ ਅਸਮਝੀ ਜਾਂਦਾ ਫਿਰ ਗਏ ਗਏ ਗਿਆਨ ਦਾ ਵਧਣ ਲੱਗਦਾ ਆਪ ਸਤ ਕੀ ਆਪ ਸਤ ਆਪੇ ਜਾਣੇ ਜਿਹੜੇ ਪੁਣੀ ਮਿੱਤ ਗੱਲ ਜਿਹੜੇ ਮੂਰਖਾਂ ਤੋਂ ਕੋਲ ਨੇ ਸੰਤ ਉਹ ਨਿਰਦੇ ਨਹੀਂ ਹਨ। ਸੰਨ ਅੰਦਰ ਪੰਜਾਬੀ ਚ ਨਾਚ ਨੂੰ ਕਹਿੰਦੇ ਜੀ। ਉਹ ਨਿਰਤ ਹੁੰਦਾ। ਨਿਰਤ ਨਹੀਂ ਹੁੰਦਾ। ਨਿਰਤ, ਨਿਰਤ। ਉਹ ਨਿਰਤ ਆ ਉਹ ਰੀ ਹੁੰਦੀ ਹੈ ਤਾਂ ਅੰਤ ਇਹ ਰਸਾ ਸਿਆਰੀ ਨਾਲ ਹੈ ਉਹ ਦੇਰ ਤੋਂ ਚੜ ਕੇ ਉਹ ਦਾਰਾ ਪੈ ਜਰਾਦਾ ਹੁੰਦਾ ਨਹੀਂ ਉਤਾਰ ਕੇ ਦਾਰਾ ਬਸ ਫੇਟੀ ਰਹੀ ਹੈ ਉਹ ਜਿਵੇਂ ਜਿਵੇਂ ਘਰ ਘਰ ਕਰਨਾ ਚਾਹਣਾ ਘਰ ਘਰ ਘਰ ਵਾਲਾ ਸੱਤ ਲਿੱਤ ਉੱਤੇ ਨਾਮ ਜਪਦਾ ਰਹਤ ਨਾਮ ਜਪਤਾ ਕੀ ਉਹ ਵੀ ਗਤੀਸ਼ੀਲ ਹੋ ਜਾਂਦਾ ਅੱਗੇ ਵੱਧ ਜਾਂਦਾ ਜਿਹੜੇ ਜਿੱਤੇਕ ਦੁਨੀਆ ਦਾ ਗਿਆਨ ਹੁੰਦਾ ਕਮ ਕਮ ਉਹਦੇ ਇਹਦਾ ਚੇਤਨਾ ਛੱਡਦਾ ਉਹਨੂੰ ਗਿਆਨ ਜਿਹੜੀ ਮੂਰਤੀ ਪੂਜਾ ਜੜਾ ਹੈ ਬੰਦਾ ਉਹ ਬੰਦੇ ਵਾਂਗੂ ਕੁਝ ਨਹੀਂ ਹੈ ਇਹ ਗੱਲ ਨੂੰ ਵਿਸ਼ਵਾਸ ਕਰ ਲੈ ਸਰ ਤੇ ਉਸ ਸਾਰੇ ਹੀ ਨੇ ਵਿਸ਼ਵਾਸ ਨਹੀਂ ਕਰਦੇ ਤਾਂ ਕਹ ਰਿਹਾ ਤੁਸੀਂ ਬਹੁਤ ਪੁਰਸ਼ਾ ਬਹੁਤ ਪੁਰਸ਼ਾ ਕਹਿਣਾ ਹੈ ਹੋ ਗਿਆ ਜੀ ਫਲਾਨੇ ਦਾ ਆ ਜਨਾਂ ਦਾ ਕੋਈ ਟੋਕਦਾ ਹੈ ਨਹੀਂ ਉਹ ਜਿਹੜੇ ਦੁੱਦੇ ਨੇ ਜਿਨ੍ਹਾਂ ਦਾ ਪ੍ਰਚਾਰ ਕਰਦੇ ਨੇ ਉਹ ਵੀ ਢੋਕਦੇ ਨੇ ਉਹ ਤਾਂ ਸਮਾਂ ਕਹੋਂਦੇ ਨੇ ਇਸ ਕਰਕੇ ਉਹ ਗੱਲਾਂ ਕਰਦੇ आप ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿੱਤ ਗੱਤ ਆਪ ਸਤ ਕੀਆ ਸਭ ਸਤ ਜੋ ਸਤ ਆਪ ਹੋਵੇ ਜਿਹੜਾ ਆਪ ਸਤ ਹੋਵੇ ਜੇ ਆਪ ਸੱਤ ਹੋਵੇ ਤਾਂ ਉਹਦਾ ਕੀਤਾ ਜੋ ਉਹ ਕਰਦਾ ਉਹ ਸੱਤ ਹੁੰਦਾ ਆਪ ਸੱਤ ਉਹਦਾ ਕੀਤਾ ਆ ਜੋ ਵੀ ਕੁਛ ਹੈ ਜੋ ਕਰਦਾ ਉਹਦਾ ਉਹਦਾ ਕੁਝ ਮੌਜੂਦ ਹੁੰਦਾ ਸਪਣਾ ਨਹੀਂ ਕਰਦਾ ਉਹ ਨਹੀਂ ਕਲਪਨਾ ਕਰਦਾ ਕਲਪਨਾ ਕਰਨਾ ਹੀ ਕਰਨਾ ਹੈ ਅਸਲ ਵਿੱਚ जो ਅਸੀਂ ਸੋਚਿਆ ਇਹ ਕਰਨਾ ਕਿ ਆਪੇ ਜਾਣੇ ਆਪਣੀ ਮਿੱਤ ਗੱਤ ਆਪੇ ਜ ਆਪਣੇ ਜਾਣੇ ਆਪਣੀ ਤੁਸਨਾ ਆਪਣੀ ਮਿੱਤ ਗੱਤ ਉਹ ਆਪ ਜਾਣਦਾ ਜਿਵੇਂ ਅੰਦਰ ਆਤਮਾ ਦੀ ਮਜਗਤ ਮਨੁਭੂਤੀ ਨਹੀਂ ਜਾਣਦੇ ਉਹ ਇਹਨੂੰ ਪ੍ਰਪਤ ਅਸੀਂ ਕਹਿੰਦੇ ਨੇ ਤਾਂ ਇਹ ਬਿਦਾਗ ਜਨਮ فرمائش دی کا سب نہیں غلط وہ وہاں اودے پر کھڑا ہاں جس کی سچھی سو کرنے ہار اور نہ بھوج کرتے وچار نس کی شیشی دی اے جس دا مالک اے جنا سچھی دا گل کیتی ہے سو ਜੇ ਕੋਈ ਕੋਰਟ ਘਾਟ ਕਰਦੇ ਆ ਹੈ ਹੋਰ ਕੁਝ ਕਰਨਾ ਹੈ ਤੇ ਜਿਹਨੇ ਪਹਿਲਾਂ ਬਣਾਈ ਉਹ ਹੀ ਬਣਾ ਸਕਦਾ ਜੋ ਕਰਨੇ ਹਾਰ ਅਬਰਨਾ ਬੂਝ ਕਰਤ ਵਿਚਾਰ ਤਾਂ ਤਾਂ ਕੇ ਉਹ ਸਮਝ ਜਾ ਜਿਵੇਂ ਯਾਰਾਰ ਜੇਸਾਨਾ ਇਹਦਾ ਜੋੜ ਲਾਇਆ ਡਾਕਟਰ ਇਹ ਹੋਰ ਕੋਈ ਨਹੀਂ ਦੂਆ ਨਹੀਂ ਕਰ ਸਕਦਾ ਹੋਰ ਜਨਾ ਮਰਜੀ ਕੋਈ ਖੋਜ ਤੇ ਨਹੀਂ ਆਤਮਾ aur sharir nu ikatthe nahi rakh sakde kise punar kise jadu naal kise baddal naal kise vidhi naal ikatthe rakh. ik vaar totheya jod nahi sakde. judeya chala aaya gaya. judeya chala aaya. tode tod ke ni jo inha de agge sakhiyan banani hoyi jande. te ik aa ਜਿਹੜੀ ਦੁਆ ਮਰਜਵੇ ਤਾਂ ਇਹੋ ਆਤਮੰਤ ਕਲ ਕੇ ਦੂਰ ਰਸਤੇ ਵਰਤਦੇ ਐਜੇ ਸਾਖੀਆਂ ਨੇ ਪਿੱਛੇ ਬਣ ਨਾਉਂਆਂ ਉਹ ਭੋਜ ਰਾਜ ਨੇ ਜੋੜੀਆਂ ਹੋਈਆਂ ਨੇ ਤਾਂ ਭੋਜ ਰਾਜ ਜਿਹੜੀਆਂ ਕੰਮ ਸੁਣਦੇ ਆ ਨਾ ਕਰਦੇ ਉਹ ਜਿਹੇ ਹੀ ਗੱਲਾਂ ਹੀ ਹੋਈਆਂ ਨੇ ਕਿਤੇ ਲਈ ਆ ਇੱਕ ਭੋਜ ਰਾਜਾ ਕਿਉਂ ਉਹ ਆ ਜਿੱਦਾਂ ਨੇ ਵਰਨਾ ਕਰਨਾ ਚਾਹੇ ਕਰੇ ਵਰਨਾ ਰਾਜਾ ਉਹ ਇਹ ਕਹਾਣੀਆਂ ਬਹੁਤ ਪੁਰਾਣੀਆਂ ਇਹ ਐਸਾ ਕੀਤੇ ਸ ਆਪਣੇ ਜੋਗੀ ਟੋਰੇ ਵਾਲੇ ਸਾਦੇ ਯਕਾਂ ਨੇ ਇਹਨਾਂ ਦੀ ਤੇ ਬਹੁਤ ਝੂਠ ਚੜ ਬੋਲਦੇ ਰਹਿੰਦੇ ਨਾ ਟਵਲ ਕਹੀ ਸੰਦੇ ਰੋਟੀ ਹੋਰਣ ਦੇ ਕੱਲ ਮਿਆਂ ਨੇ ਕਿ ਉਹ ਸੀ ਤਾਂ ਨਾ ਦੀ ਗੱਲ ਸੀ ਧਿਆਨਤਾ ਨੂੰ ਬਤਾ ਦਿੱਤੀ ਸੀ ਕਿ ਤੇ ਲਾਉਣੇ ਛੋਟੂ ਬਟੀ ਬਤਾਇਆ ਨਾ ਉਹ ਵਿਚਾਰ ਗਿਆ ਜਾਂਦੇ ਮੈਨਾਂ ਧਿਆਨ ਹੁੰਦਾ ਹੀ ਨਹੀਂ ਪਹਿਲਾਂ ਗਿਆਨ ਪਿੱਛੋਂ ਤਿਆਰ ਸੋ ਇਹ ਕਫਫਫ ਮਾਰ ਕੇ ਚੱਲ ਪਾ ਕਰ ਲੈ ਦਿੱਤੀ ਕਰਤੇ ਕੀ ਮਿੱਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀ ਆ ਕਰਤੇ ਕੀ ਮਿੱਤ ਨਾ ਜਾਣੇ ਕੀਆ ਕਰਤੇ ਦੇ ਮਨ ਵਿੱਚ ਕੀ ਹੈ ਕਰਤੇ ਦਾ ਪ੍ਰੋਗਰਾਮ ਅਗਲਾ ਕੀ ਹੈ ਫਿਰਦੌਸ ਵੀ ਬਾਗਨ ਵਾਲੀ ਗੱਲ ਤਾਂ ਅਗਲੀ ਹੈ ਜਿਹੜੀ ਆਉਣੀ ਜਿਹੜਾ ਕੀਤਾ ਹੋਇਆ ਉਹ ਵੀ ਉਹਦਾ ਜਾਣ ਰਿਹਾ ਇਹ ਆਖ ਦੇ ਕੀ ਕਹੋ ਨੇ ਕੁਰਾਨੀ ਜੋਤਿਸ ਤਾਵੇਸੋਂ ਵਰਤਦੇ ਸੇ ਚੀਜ਼ ਨਾਲ ਐਕਸ਼ਨ ਪੋਜ਼ਿਟਿਵ ਆ ਉਸੇ ਚੀਜ਼ ਦਾ ਦੂਜੀ ਚੀਜ਼ ਨਾਲ ਨੈਗੇਟਿਵ ਆ ਰਿਐਕਸ਼ਨ ਨਿਕਲਦੀਆਂ ਆ ਰਹੀਆਂ ਇੱਕ ਦੋ ਚੀਜ਼ ਤੇ ਖਾ ਲੈਣੇ ਵੀ ਇਹਦਾ ਖਾ ਰੋ ਨਾਲ ਰਿਐਕਸ਼ਨ ਹੁੰਦਾ ਉਹ ਰਿਐਕਸ਼ਨ ਕਿਉਂ ਦਾ ਰਿਐਕਸ਼ਨ ਕਿਉਂ ਨਹੀਂ ਹੁੰਦਾ ਇਹ ਤਾਂ ਉਹਨੇ ਬਣਾਇਆ ਹੋਈ ਜਾਂ ਸਾਨੂੰ ਇਹਨਾਂ ਪਤਾ ਵੀ ਰਿਐਕਸ਼ਨ ਹੋ ਜਾਂਦਾ ਰਿਐਕਸ਼ਨ ਹੋ ਜਾਂਦਾ ਸਾਨੂੰ ਪਤਾ ਹੈ ਕਿਉਂ ਹੁੰਦਾ ਜਵਾਬ ਹੋਣੀ ਹਾਂ ਕਰਤੇ ਕਿਵੇਂ ਨਾ ਜਾਣੇ ਕੀਆ ਆ ਕੀਤੀ ਹੋਈ ਜੋ ਕੀਤਾ ਹੋਇਆ ਕੀਤਾ ਹੋਇਆ ਸਾਰਾ ਰਚਨਾ ਦੀ ਕੀਤੀ ਹੋਈ ਹੈ ਨਾ ਤੇ ਇਹਨੂੰ ਕੋਈ ਜਾਣਦਾ ਜਾਉਦੇ ਮੰਦੇ ਵਿੱਚ ਕੀ ਚੱਲ ਰਿਹਾ ਉਹ ਨੂੰ ਕੋਈ ਜਾਣਦਾ certes ਕਿ ਮਿੱਤਰ ਜਾਣਿਆ ਕੀਆ ਜੋ ਤੁਸੀਂ ਭਾਵੇਂ ਜੋ ਪਰਮੇਸ਼ਰ ਤੋਂ ਕਰ ਮਿੱਤਰ ਕੀ ਹਾਂ ਮਿੱਤਰ certes ਕਿ ਮਿੱਤਰ ਤੇ ਤਾਂ ਮੰਨਦੀ ਅਵਸਥਾ ਆ ਉਹਦੇ ਬੰਦ ਕੀ ਹੈ ਮਿੱਤਰ ਉਹਦੇ ਬੰਦੀ ਗੱਲ ਆਪਾਂ ਕਹਿੰਦਾ ਕਿ ਮੱਠੀ ਹੋਈ ਹੈ ਤੇਰੀ ਉਹ ਜਿਹਨੂੰ ਆਪਾਂ ਮੱਠੀ ਹੋਈ ਕਹਿੰਦੇ ਆ ਉਹਨੂੰ ਮਿੱਤਰ ਕਹਿੰਦੇ ਨੇ certes ਉਹ ਕੋਈ ਨਾ ਬੁੱਜੀਰ ਕਹਿੰਦੇ ਇਸਦਾ ਬਦਲ ਕੀ ਮੱਠੀ ਹੋਈ ਹੈ ਉਹ ਮੱਠੀ ਲਾਵੇ ਮਿੱਤਰ ਤੋਂ ਬਣਿਆ ਹੋਇਆ ਮਿਤੀ ਲਗਦਾ ਹੈ ਮਿਤੀ ਹੈ ਲਗ ਮਿਤੀ ਮਿਤੀ ਦਾ ਮਤੀ ਹੋਈ ਬਣਿਆ ਹੋਇਆ ਪੰਜਾਬੀ ਚ ਜੋ ਅਨਪੜਾ ਵੀ ਨੇ ਪੜੇ ਸੁਣ ਲੈਦੇ ਤੇ ਉਹ ਹੀ ਬੋਲ ਦਿੰਦੇ ਸੀ ਜੈਜੀ ਉਹਨੇ ਤਾਂ ਬੋਲ ਦਿੱਤੀ ਪਾਜਾ ਉਹ ਤੇ ਬੇੜਕੇ ਆਇਆ ਜਿਹਾ ਸਾਡੇ ਪੰਜਾਬੀ ਕਰਤੇ ਕਿ ਮਿਤੀ ਇਹਨਾਂ ਜੋਤ ਸੁਭਾਵੇ ਮਿੱਟੀ ਤੇ ਮਤ ਬਣਿਆ ਹੋਇਆ ਮੱਤੀ ਬਣਿਆ ਹੋਇਆ ਮਿੱਟੀ ਤੇ ਮੱਤੀ ਬਣਿਆ ਹੈ ਹਾਂ ਨਾਲ ਕੁਦਰਤ ਸਭ ਕੁਝ ਵਰਤੀ ਆ ਜੋ ਤੁਸੀਂ ਜੋ ਪਰਮੈਸ਼ਰ ਤੋਂ ਪਉਦਾ ਜਿਹਨੇ ਸ੍ਰਿਸ਼ਟੀ ਦਾ ਮਾਲਕ ਹੈ ਜਿਹਨੇ ਬਣਾਈ ਹੈ ਉਹ ਵਰਤ ਰਿਹਾ ਲੋਕਾਂ ਨੂੰ ਤਾਂ ਨਾ ਆਉਦਾ ਕਿ ਮੈਂ ਕੀ ਕਰ ਦੇਣਾ ਅਗਲੇ ਪਲ ਦੇ ਵਿੱਚ ਨਾ ਇਹ ਗੱਲ ਦਾ ਪਤਾ ਸਾਨੂੰ ਤਾਂ ਕਿਵੇਂ ਉਹ ਕਰ ਰਿਹਾ ਕਿਵੇਂ ਹੋ ਰਿਹਾ ਉਹ ਕਿਹੜਾ ਕੋਈ ਧੀਰਦਾ ਕਰਨੀ ਕਿਦਾਂ ਪ੍ਰਗਟਤਾ ਹੈ ਇਹ ਨਹੀਂ ਕਿਤੇ कि ਕਰਦਾ ਆ ਸਾਨੂੰ ਜੋ ਪ੍ਰਗਟ ਨਹੀਂ ਜਿਹੜਾ ਪ੍ਰਗਟਾ ਉਹ ਕਰਦਾ ਹੈ ਜਿ ਕਰਾਇਆ ਕਰਦਾ ਜਿਹੜਾ ਪ੍ਰਗਟ ਰੂਪ ਚ ਕਰਦਾ ਜਦੋਂ ਨੂੰ ਕਹਨੇ ਉਹਦਾ ਕਰਦਾ ਹੈ ਜੀ ਜਿਹੜਾ ਕਰਦਾ ਹੁਦੀਦਾ ਹੈ ਜੀ ਇੱਥੇ ਆ ਤੇ ਆ ਗਏ ਜੀ ਉਹ ਨਫਾ ਵਾਲੀ ਗੱਲ ਕੁੱਡੀ ਫਸੀ ਪਈ ਆ ਅੱਖ ਖੂਰੇ ਜੋ ਕਹਦਾ ਉਹ ਉਹਨੂੰ ਕਹਿੰਦੇ ਨੇ ਕਰਦਾ ਜੀ ਇੱਥੇ ਹੀ ਜਿਹੜੇ ਕਮਿਊਨਿਟੀ ਆ ਆਪਣੇ ਜਿਹੜੇ ਬੋਲੀ ਨੇ ਕਹਿੰਦੇ ਗੱਡੇ ਪਾਗਲ ਨੇ ਲੋਕ ਤੇ ਸੋਭਣੇ ਉਹਨੂੰ ਕਹਿੰਦੇ ਨੇ ਹੈ ਜੀ ਜੋ ਹੈ ਨਹੀਂ ਉਹ ਕਹਿੰਨੇ ਨੇ ਸਾਹਮਣੇ ਹੈ ਨਹੀਂ ਉਹ ਕਹਿੰਨੇ ਨੇ ਸਭ ਉਹ ਜੁਰੀ ਕਰਦਾ ਇਹ ਤਾਂ ਪਾਗਲ ਕੋਈ ਇਨਕਾਰੀ ਹੋ ਹੋਗੇ ਕਿਤੇ ਵੀ ਪਾਵਰ ਤੋਂ ਇਨਕਾਰੀ ਹੋ ਇਹ ਤਾਂ ਆਖੇ ਮਾਰ ਖਾ ਲਿਆ ਮਾਰ ਖਾ ਗਏ ਥੋੜੇ ਤੇ ਖੋਜ ਦੀ ਕੋਈ ਮਾਰ ਕੇ ਮਾਰ ਗਏ ਸਤਿ ਸੰਸਰ ਨੂੰ ਲੈ ਕੇ ਚਲਿਆ ਸੀਗਾ ਉਹਦੇ ਉਹਨੇ ਜੋ ਕੁਝ ਮੇਰੇ ਨਾਲ ਬੜੇ ਦਰਸਤਾ ਬੜੇ ਰਾਸਾ ਵਾਲੇ ਉਹਨਾਂ ਦੀ ਹਈ ਕੱਖ ਨਹੀਂ ਸੀ 12 ਸਾਲ ਮਤਾਂ ਮਾਰਿਆ ਤਾਂ ਮਿਲਿਆ ਕੁਝ ਵੀ ਨਹੀਂ ਮਿਲਦਾ ਉਥੋਂ ਕਿਸੇ ਜਿਹਫਦਾ ਦਾ ਮਿਲਦਾ ਕਾਸ਼ੀ ਵਾਲੋਂ ਵਿਖਲਾ ਫੇ ਝੱਡਾ ਗੱਡਿਆ ਸੀ ਕਾਸ਼ੀ ਦੇ ਵਿੱਚ ਹੀ ਚੇਦਦੀ ਕੁਰੀ ਸੀ ਨਾ ਛੇਵਾਲੇ ਕਾਸ਼ੀ ਤੇ ਆਹ ਉਹ ਰਾਜਾ ਸੀ ਉਹ ਰਾ ਛੇਵਾਲਾ ਕੰਮ ਵੀ ਕਰ ਲਿਆ ਉਹਨੇ ਤਾਂ ਛੇਵਾਲੀ ਕੋਲ ਜਾ ਕੇ ਉਥੋਂ ਵੀ ਕੁਝ ਨਹੀਂ ਮਿਲਿਆ ਗੱਲ ਤਾਂ ਬੜੀ ਵੀ ਨਹੀਂ ਕੁਝ ਮਿਲਿਆ ਦੋਹਾ ਚਲ ਨਹੀਂ ਮਿਲਿਆ ਤਾਂ ਕਹਿੰਦੇ ਨੇ ਜਿਹਨੂੰ ਪੁੱਛੇ ਮੇਰਾ ਬਹਿਗਾ ਜੱਪੇ ਦਾ ਜਦੋਂ ਤਾਂ یہ हैगा कहना کہنا تھا پروف دوے رہی ہے کیا سمجھ رہی نہیں ہو تو تو پک دی گئی کیتی ہے جنے اس کا کہ وہ دوہا پھساؤ تو فزے یہ بچال رہا ہے है ہے ہے راجا اور جتھے جٹانی بہن وہ جدا داری ਗੁੰਡਾ ਰਾਜਾ ਵਾਧਾ ਹੋ ਗੋਦ ਵਾਧਾ ਹੋ ਗੋਦ ਰਾਜਾ ਦਾ ਗੁੰਡਾ ਰਾਜਾ ਦਾ ਗੁੰਡਾ ਛੱਡ ਕੇ ਨੀ ਗਿਆ ਰਾਜਾ ਤਾਂ ਛੱਡ ਗਿਆ ਰਾਜਾ ਤਾਂ ਛੱਡ ਗਿਆ